ਤੁਕਰੀ ਬਸੇ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਕਰੇ ਸੁਖੀ ਬਸੇ ਬਨਖੀਤ ਆਪ ਨਿਵਾਰਤਲੇ ਤਲੇ ਬਸੇ ਮਸਕੀਨੀਆਂ ਜਿਹੜਾ ਮਸਕੀਨੀਆਂ ਸਭ ਤੋਂ ਦੀਵਾ ਜਿਹੜਾ ਹੋਵੇ ਉਹਨੂੰ ਮਸਕੀਨੀਆਂ ਕਹਿੰਦੇ ਸਨ ਸਭ ਤੋਂ ਗਰੀਬ ਦਾ ਨਾਮ ਮਸਕੀਨ ਆਪ ਗਰੀਬ ਸੁਖੀ ਜੀ ਜੀ ਤੁਹਾਨੂੰ ਤੋਗਿਆ ਆਮ ਗਰੀਬ ਮਸਕੀਨ ਪ੍ਰਭੂ ਤੇ ਹਰ ਰਾਖ ਰਾਖ ਬੜਾ ਵੱਡਾ ਤੋਂ ਵੱਡਾ ਮੈਂ ਗਰੀਬ ਤੋਂ ਵੀ ਗਰੀਬ ਤੋਂ ਥੱਲੇ ਮਸਕੀਨ ਇਹੋ ਥੱਲੇ ਕੋਈ ਨਹੀਂ ਸਭ ਸੂਹੀ ਵゼ ਮਸਕੀਆਂ ਜਿਹੜਾ ਨਿਵਾਰ ਆਪ ਨਿਵਾਰ ਥਲੇ ਆਪਣੇ ਆਪ ਨੂੰ ਸਾਰੇ ਨਾਲ ਕਰਕੇ ਸੂਹੀ ਬਣ ਜਾਂਦੇ ਵੱਡੇ ਵੱਡੇ ਹੰਕਾਰੀਆਂ ਨਾਲਿਕ ਗਰਭ ਕਰੇ ਵੱਡੇ ਵੱਡੇ ਹੰਕਾਰੀਆਂ ਉੱਚੇ ਤੋਂ ਦਾ ਹੰਕਾਰ ਤੋਂ ਤੇ ਜਦ ਬਾਅਦ ਜਦ ਵੀ ਜੜ ਜਾਂਦਾ ਉੱਥੇ ਦੇ ਵੀਰ ਤੋਂ ਇਹਦੇ ਪਾਣੀ ਹੈ ਉਹਦੇ ਰੇਕ ਚਾਹੀਦੀ ਹੈ ਕਾਬੂੀ ਹੋ ਜਾਂਦਾ ਉਹਦੇ ਕੋਲ ਰੌਣਕ ਰਹਿੰਦੀ ਹੈ ਹਰਦਾ ਦੇ ਉਹ ਤੇ ਤੇ ਕੌਣ ਹੁੰਦਾ ਉਹਦੇ ਦੂਰ ਦੂਰ ਦੀ ਇਸ ਕਰਕੇ ਉਹ ਤੇ ਸੁੱਕੀ ਆ ਬੱਦੇ ਮੁਕੀ ਲੀਆਂ ਪਾਰਸਾਂ ਲੈ ਵੱਡੇ ਵੱਡੇ ਹੰਦਾਰੀਆਂ ਵੱਡੇ ਵੱਡੇ ਦੇ ਗੁਣ ਡਲ ਜਾਂਦੇ ਨੇ ਇਹਦੇ ਗੁਣ ਨਹੀਂ ਕਰਦੇ ਵਿੱਚ ਸਗੋਂ ਦੇ ਜਿਹੜੇ ਫੀਮੈਂਟ ਨੇ ਉਹਦੇ ਵੀ ਬਿੱਲਟੀ ਵੀ ਡੱਕਰ ਹੋ ਜਾਂਦੀ ਹੈ ਉਹਦੇ ਸਾਰਾ ਸਾਲ ਬਿੱਲ ਵੀ ਰਹਿੰਦੀ ਹੈ ਉਹ ਜੇ ਤਾਂ ਕਾ ਉਹ ਜੀ ਬਾਇ ਤੇ ਪੰਚ ਪੈਦਾ ਹੋਈ ਇਹ ਕਿਰਿਆ ਦੂਜੇ ਤੋਂ ਨਿਕਿਆ ਕਿਹਦਾ ਹਾਂ ਇਹਦਾ ਹਿਰਦਾ ਹਰ ਰਹਿਦਾ ਫਦਾਈ ਤੇ ਉਹ ਉਪਸਥਿਤ ਉਹ ਬੁਝਿਆ ਤੁਸੀਂ ਦੀਆਂ ਜਲੇ ਬੁਝਿਆ ਰਹਿੰਦੇ